संत ਕਾ दोखी बिगड़ ਰੂਪ हो जाए संत का दोखी बिगड़ रूप हो जाए, बिगड़ रूप, हो जाए। <coughs> बिगड़ रूप की होता पाले शरीर दे गल नहीं है पहली एक रूप कुजा तो को लकड़ी सोरे पे ये बुरी ओदा मानदा रूप बिगड़ गया जो आदमी आपा कहने की बिगड़ेगा ला मैं बुड्ढा बगल के आया बिगड़ गया डाकू बन गया की बिगड़ेगा दसो मन बिगड़ेगा बिगड़ रूप हो जाए संत का दुख की सच तो बिगड़ गया सच तो चोर बन गया बिगड़ेया है रूप चोर है ਸੁਧਰੇ ਹੋਇਆ ਸੱਚ ਹੈ ਸੱਚ ਸੁਧਰ ਹੈ ਸੁਧਰੇ ਹੋਇਆ ਰੂਪ ਸੁਧਰ ਹੁੰਦਾ ਹੈ بگੜਿਆ ਹੋਇਆ ਰੂਪ ਤੋਂ ਰੂਪ ਹੋ ਜਾਂਦਾ ਹੈ بگੜ ਰੂਪ ਹੋ ਜਾਂਦਾ ਹੈ ਉਹਦਾ ਜਿਹੜੀ ਵਿਚਾਰਤਾਰਾ ਉਹ بگੜ ਜਾਂਦੀ ਹੈ ਉਹ ਸਾਬਤ ਵੀ ਕਰ ਸਕਦਾ ਪਰਮੇਸ਼ਰ ਕੀ ਹੈ ਜਰਾਤਾ ਆਪੂ ਸਾਹਿਬ ਵੀ ਕਰ ਸਕਦਾ ਨਿਸ਼ਾਕਾਰਤਾ ਰੂਪ ਨਹੀਂ ਕਰ ਸਕਦਾ ਰੂਪ रूप ਪਊਗਾ ਮੂਰਤੀ ਰਖਣੀ ਪਊਗੀ ਉਹਨੂੰ ਔਕਾਰ ਮੂਰਤੀ ਵਿਝਾਇਆ ਬਖੜੇ ਰੂਪ ਦਾ ਪੁਜਾਰੀ ਹੋ ਗਿਆ ਓ ਅੱਖਾਂ ਨੂੰ ਜੋ ਮਾਇਆ ਦੀ ਦੀ ਆ ਉਹਦਾ ਪੁਜਾਰੀ ਆ ਮੂਰਤ ਦਾ रूप ਹੋ ਗਿਆ ਬੇਤਰ ਗਿਆ ਨਾ ਰੂਪ ਦਾ ਰੂਪ ਦਾ ਹੈ ਉਹ ਉਹ ਅਨੂਪ ਰੂਪ शब्द ਗੁਰੂ ਦੀ ਜਗਾ ਆ ਜਿਹੜਾ ਗੁਰਬਾਣੀ ਦੇ ने ਨਹੀਂ ਗੁਰਬਾਣੀ पोथी ਕੋਥੀ है ਹੈ ਇਹ ਰੂਪ ਰੂਪਨ ਲੱਗਿਆ ਇਹਦਾ ਖਾਨੂਦੀ ਦੀ ਹੈ ਬਸ ਤੂੰ ਇਹਦਾ ਅਲੱਗ ਹੈ ਵੀ ਇਹ ਦੀ ਅਜ਼ੀਤ ਕਿੰਨੀ ਕਰਦੇ ਹਾਂ ਤਾਂ ਕਰਾਂਗੇ ਹੀ ਕੋਥੀ ਪਰਮੇਸ਼ਰ ਦਾ ਥਾਨ ਹੈ ਓਹੀ ਗੱਲ ਹੈ ਇਹਦੇ ਜਰੂਰ ਰੂਪ ਦੱਸਾਇਆ ਗਿਆ ਹੈ ਰੂਪ ਕੀ ਹੈ ਜਿਹੜੇ ਰੂਪ ਦੀ ਅਸੀਂ ਪੂਜਾ ਕਰੀਓ ਜੇ ਲਿਖਿਆ ਹੋਇਆ ਹੈ ਇੱਥੇ ਤਾਂ ਇਹਦੀ ਬੋਰਡਰ ਸਰ ਇਹ ਕਿਹੋ ਜਿਹਾ ਪਤਾ ਲੱਗਣਾ ਸਾਧੂ ਰੂਪ ਕੀ ਹੈ ਉਹ ਕਿਹੜੇ ਰੂਪ ਦੀ ਪੂਜਾ ਕਰਦੀਆਂ ਕਿਹੜੇ ਦੀ ਨਹੀਂ ਕਰਦੀਆਂ ਸਾਰਾ ਨਕਸ਼ਾ ਇਹ ਸਾਡੇ ਕੋਲ ਇਹ ਨਹੀਂ ਤਾਂ ਅਸੀਂ ਚੱਲੀਏਗੇ ਤੁਹਾਨੂੰ ਨਕਸ਼ੇ ਦੇ ਬਣਾ ਜਾਈਏ ਕਿਥੇ ਪਿੰਡ ਨੂੰ ਚੱਲਿਆ ਕਿਸੇ ਪਿੰਡ ਦੀ ਪਰਮੇਸ਼ਰ ਕਰਨ ਪੜਵਾ ਲਈ ਪਿੜਦਾ ਨਖੈਦੋ ਆਜੀ ਕੀ ਕਰਤਾ ਸੀ ਗਾ ਤਾ ਨਖੈਦਾ ਕੋ ਲੈਵੇ ਉਹ ਤਾਂ ਕੀ ਕਰ ਜਲੇ ਕੁਰਬਾਨੀ ਦੇ ਬਿਨਾ ਜੀਵਨ ਖਤਮ ਹੈ ਕੁਰਬਾਨੀ ਦਾ ਨਖੈ ਸਾਡੇ ਕੋਲ ਇਹਦੇ ਤਾਂ ਮਾਰ ਗਿਆ ਚ ਇਹ ਨਖੈਦ ਨਖਮ ਜਾਂ ਗੋਵੇ ਤੋਰੇ ਦੀ ਤਰ੍ਹਾਂ ਵੇਸੀ ਜਦੋਂ ਆਪਾਂ ਕਹਿੰਦੇ ਨੇ ਗੁਰੂवाणी ਇਹ ਕਹਿੰਦੇ ਵਿਚਾਰੇ ਇਹਦੇ ਮੁਖਾਲਕੋ ਜਿਹੜੇ ਨੇ ਪੋਸਤੇ ਖੜੇ ਨੇ। ਉਹ ਆ ਰੁਕੀ ਪਤਾ ਬਾਗਲਾਂ ਨੂੰ। ਉਹਦਾ ਸਦਾਈ ਵਿਚਾਰਧਾਰਾ ਹੀ ਉਹਨਾਂ ਦੀ ਉਲਟ ਹੈ। ਵਿਚਾਰ ਪੋਤੀ ਦਾ ਲਿਖਿਆ ਇਹਨਾਂ ਅਖਰਾਂ ਵਿੱਚ ਗੁਰੂ ਖੋਜੇ ਅਖਰ ਭਤੀ ਦੇ। ਫਿਰ ਦੇਸ਼ਵਾਨ ਹੈ ਇਹ ਤਾਂ ਜੋ ਦੀਦਾ ਖੜਾ ਜੋ ਇਹ ਲਿਖਿਆ ਉਹ ਤੁਸੀਂ ਦੇਖ ਲਓ ਤੁਸੀਂ ਇਹ ਕੀ ਹੈ ਪਰ ਉਹ ਤਾਂ ਪੜਦਾ ਹੀ ਨਹੀਂ ਇਹਨੂੰ ਤਾਂ ਇਹ ਤਾਂ ਤਿਆਗੀ ਹੋਈ ਹੈ ਉਹਨਾਂ ਨੇ ਗੁਰਬਾਣੀ ਦਾ ਇਹ ਤਾਂ ਪੜਣੀ ਅਰੇ ਇਹਨੂੰ ਤਾਂ ਬਜਾਰ ਦਾ ਵੀੜਿਆਂ ਵਾਲੀ ਪ੍ਰਚਾਰਦੇ ਨੇ ਉਹ ਤਾਂ ਵੀੜਿਆਂ ਦੇ ਵੀੜਿਆਂ ਦਾ ਡੀਐਨਏ ਉਹਨਾਂ ਦੇ ਵਿੱਚੋਂ ਸਾਰਾ ਵੀੜਿਆਂ ਦਾ ਪਰਿਵਾਰ ਕੋਈ ਉਹਨਾਂ ਨੂੰ ਕਦੇ ਪਤਾ ਨਹੀਂ ਵੀ ਪ੍ਰਚਾਰ ਆਇਆ ਪੁਰਵਿਕੋ ਕਰੀ ਜਾਂਦੇ ਨੇ ਉਹਨਾਂ ਨੇ ਬਨ ਲਿਆ ਵੇ ਸੀ ਮੀਣੇ ਆਲਾ ਕਰਨਾ है ਦਾ ਦੋਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੋਖੀ ਕੋ ਦਰਗਹੇ ਮਲੇ ਸੁਜਾਏ ਸੰਤ ਦਾ ਦੋਖੀ ਵਿਗੜ ਰੂਪ ਹੋ ਜਾਏ ਸੰਤ ਦਾ ਦੋਖੀ ਜਿਹੜਾ ਉਹਦਾ ਰੂਪ ਵਿਗੜ ਜਾਂਦਾ ਉਹਦੀ ਜਿਹਦੀ ਮੱਤ ਹੈ ਉਹਦਾ ਰੂਪ ਵਿਗੜ ਜਾਂਦਾ ਉਹਦੀ ਬੁੱਧੀ ਵਿਗੜ ਜਾਂਦੀ ਉਹਦੀ ਇਚਾਰ ਧਾਰਾ ਵਿਗੜ ਰੂਪ ਵਗਾੜ ਕੇ ਜਾਂ ਉਜੜਾ ਪਹਿਲਾਂ ਜਿੰਨਾ ਗਰੂਪ ਸੀ ਉਹ ਤੋਂ ਵੀ ਵਗਾੜ ਲਿਆ ਜਿੱਦਾਂ ਕਿ ਲੈ ਗਿਆ ਤੇ ਉਹ ਤੋਂ ਵੀ ਵਗਾੜ ਗਿਆ ਵਗਾੜ ਕੇ ਲੈ ਕੇ ਜਾਂਦਾ ਜਿੰਨਾ ਸਿਮਰਿਆ ਤਾਂ ਉਹ ਵੀ ਬਣ ਗਿਆ ਹਾਂਜੀ ਸੰਤ ਦਾ ਦੋਖੀ ਸਦਾ ਸਹਿਕਾਈਏ ਸੰਤ ਦਾ ਦੋਖੀ ਸੰਤਰਾ ਦੋਖੀ ਨਾ ਮਰੇ ਨਾ ਜਿਵਾਈ ਜਾ ਤਾਂ ਮੁਰਦੇ ਆ ਨਾ ਵਰਿਆਂ ਜਿਨਾਂ ਜਿਉਂਦੇ ਆ ਸਾਹ ਇਕੱਦਾ ਹੀ ਰਹਿੰਦਾ ਕਿਉਂਕਿ ਸਰਕਾਰ ਚਲਦੀ ਹੁੰਦੀ ਆ ਵੀ ਉਹ ਕਰੇ ਅੰਤਰੋੜ ਰਿਹਾ ਹੋਇਆ ਹੁੰਦਾ ਅੰਤਰੋੜ ਰਿਹਾ ਹੋਇਆ ਹੁੰਦਾ ਪਰਮੇਸ਼ਰ ਦੀ ਪਰ ਐਦਰੋ ਵੀ ਡਰਿਆ ਹੁੰਦਾ ਐਦਰ ਸਰਕਾਰ ਤੇ ਡਰਿਆ ਹੁੰਦਾ ਝੂਠੀ ਤੇ ਦਰ ਸੱਚੀ ਤੇ ਡਰਿਆ ਹੁੰਦਾ ਦੋ ਉਹ ਤਾਂ ਫਸਿਆ ਹੁੰਦਾ ਤਾਂ ਸਹਿਕਾ ਇਹ ਪੋਛ ਜਾਂਦਾ ਹੁੰਦਾ ਹੈ ਉਹ ਪਿੱਛੇ ਵੀ ਵੀ ਤੇ ਕੀ ਹਾਲ ਹੋਊਗਾ ਨਾ ਮਰੇ ਨਾ ਮਰੇ ਕਿਹਨੇ 2.0 ਉਹਨਾਂ ਨੇ ਸਰਕਾਰਾਂ ਇਹਨਾਂ ਕੋਈ ਬਹਾਨੀਆਂ ਕੋ ਹੁੰਦੇ ਨੇ ਲਾ ਨੂੰ ਆਪੇ ਪਤਾ ਹੁੰਦਾ ਪਤਾ ਨਹੀਂ ਜੋ ਕਰ ਰਹੇ ਨੇ ਪਾਸੇ ਲੋ ਬਾਣੀ ਦੇ ਵਿੱਚ ਵੀ ਰੱਜ ਰਹੇ ਨੇ ਜੋ ਵੀ ਗੱਲ ਸੱਚੇ ਚ ਆ ਰਹੀ ਹੈ ਸਭ ਉੱਥੇ ਜੁੜੀ ਹੋਈ ਹੈ ਔਰ ਸਭ ਨੂੰ ਜਾਂਦੀ ਹੈ ਪਤਾ ਨਹੀਂ ਇੱਕਦਮ ਸ਼ਿਵਾ ਦੀ ਫੋਟੋ ਕਿਵੇਂ ਕਿ ਮੈਂ ਆਦੀ ਉਹ ਪ੍ਰਗਟ ਕੀਤਾ ਨਾ ਵੀ ਸਾਡਾ ਇਹ ਨਿਆਜ਼ ਵੀ ਨਾ ਕਿਤੇ ਲਿਖੇ ਜਾਉਂ ਉਹ ਲੇਖਾ ਚੱਕਾ ਸੀਗਾ ਉਹਨਾਂ ਨੇ ਹੋਰ ਕੀਤਾ ਸੀ ਵੀ ਐਨੇ ਸਾਡੇ ਬੰਦੇ ਜੁੜ ਚੁੱਕੇ ਨੇ ਤੁਸੀਂ ਦੱਸੋ ਕੀ ਕਰਾਂਗੇ ਬੰਦਿਆਂ ਦਾ 500 600000 ਕਿਥੇ ਲਾਉਂਦਾ ਬੱਸ ਇੰਨੇ ਦਾ ਨਾ ਪਾਰਟੀਆਂ ਨਾ ਹੁੰਦੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਨਾ ਕਿੰਨੇ ਕ ਬੰਦੇ ਹੁੰਦੇ ਨੇ ਕਿਨੇ ਉਹ ਜੀ ਬੁੱਧ ਸੁਪਤਾ ਆ ਵਕੀ ਉਹ ਜਦ ਜਸਾਨਤਾ ਦਾ ਸੋ ਸਾਰੇ ਬੰਦੇ ਇਕੱਠੇ ਹੋ ਗਏ ਵੱਡੇ ਵੱਡੇ ਪੱਬ ਕੀਤੇ ਹੋਏ ਨੇ ਬਧਾਨ ਹਾਂਜੀ ਸੰਤ ਕੇ ਦੌਖੀ ਕੀ ਪੂਜੇ ਦਾ ਆਸਾ ਸੰਤ ਕੇ ਦੌਖੀ ਕੀ ਪੂਜੇ ਨਾਲ ਆਸਾ ਸੰਤ ਕੇ ਦੌਖੀ ਦੀ ਇੱਛਾ ਪੂਰੀ ਨਹੀਂ ਹੁੰਦੀ ਸੰਤ ਦੇ ਦੌਖੀ ਨਹੀਂ ਚੱਕਮਾਂ ਪੂਰੀ ਹੁੰਦੀ ਨਹੀਂ ਨਹੀਂ ਸ੍ਰੀ ਕਰ ਦੇ ਇੱਛਾ ਪੂਰੀ ਹੋ ਗਈ ਗੁਰੂ ਬੜੀ ਹੋ ਸੇ ਕੰਮਿਆ ਹੋ ਸਕਿਆ ਲੜਨ ਦੇ ਮੁਕਾਬਲੇ ਨਹੀਂ ਕੰਮਿਆ ਹੋ ਸਕਿਆ ਸ੍ਰੀ ਜਨ ਲੜਨ ਦੇ ਬੁੱਢੇ ਨਹੀਂ ਕੰਮਿਆ ਹੋ ਸਕਿਆ ਗੁਰੂ ਮਰਦਾਸ ਜੀ ਰੱਬ ਸੰਤ ਦੇ ਦੌਖੀ ਨਹੀਂ ਹੋ ਚਲੇ ਆਉਂ ਕਿ ਸੰਤ ਦੇ ਦੌਖੀ ਕਿਵੇਂ ਜਾਂਦੇ ਨੇ ਉਹਨਾਂ ਦਾ ਮੁੰਡੇ ਨਹੀਂ ਕੰਮ ਹੋ ਸਕੇ ਚੌਥੇ ਪਾਸ਼ਾ ਦੇ ਮੁਕਾਬਲੇ ਚ ਅੰਦਰ ਇਹ ਦੋ ਭਾਈ ਨੇ ਇਹਨਾਂ ਦੇ ਉਹ ਖਿਲਾਫ ਨੇ ਮਾਹਰ ਦੇ ਤੇ ਪ੍ਰਤੀਜਾ ਮਾਹਰ ਦੇ ਤੇ ਪ੍ਰਤੀਜਾ ਨਹੀਂ ਹੋ ਚ ਗੁਰਰਾਮ ਵੀ ਯਾਨਾ ਹੋ ਰਹੀ ਪਣਾ ਦਾ ਕੀ ਚੱਲਿਆ ਬਈ ਬੀਣਾਂ ਦਾ ਕੀ ਚੱਲਿਆ ਬੀਣਾਂ ਦਾ ਕੋ ਨਾ ਲੜਨ ਆਵਾ ਹੈ ਤੇ ਵੀੜਿਆਂ ਲੋਕ ਜਾਣਦੇ ਵੀ ਨਹੀਂ ਮੈਂ ਲੈਣ ਲੱਗੇ ਬੀਣਾ ਵੀਣਾ ਕੋਈ ਹੋਣਾ ਨਹੀਂ ਚਾਹਦਾ ਜੇ ਕਿ ਉਹਨੂੰ ਵੀਣਾ ਕਹੇ ਤੇ ਉਹਨੂੰ ਪਤਾ ਨਹੀਂ ਕਿ ਕੌਣ ਹੈ ਹੈਗੇ ਉਹ ਵੀ ਇਹ ਕਹਿੰਦਾ ਮੈਂ ਵੀਣਾ ਉਹ ਕੌਣ ਹੁੰਦੇ ਨੇ ਲੋਕਾਂ ਨੂੰ ਪਤਾ ਹੀ ਨਹੀਂ ਵੀੜ ਜਦ ਦਾ ਪਿਛਲਾ ਇਤਿਹਾਸ ਚੱਕੇ ਗੁਰੂ ਕਾ ਵੀਣਾ ਵੀਣਾ ਲੱਗਦਾ ਹੈ ਵੀਣਾ ਦਾ ਕਹਾਵਾ ਗੁਰੂ ਇਹਨੂੰ ਧਰਤੀਏ ਨੂੰ ਕਹਿੰਦੇ ਨੇ ਜਿਹੜਾ ਮદાન ਚ ਆ ਕੇ ਚਰਚਾ ਗਿਆ ਚਰਚਾ ਕਰਦਾ ਦੀ ਭੇਡੂ ਦੀ ਹੈ ਮੀਸ਼ਨਾ ਨਰ ਮੀਸ਼ਨਾ ਵੀ ਕਹਿੰਦਾ ਨਰ ਮੀਸ਼ਾ ਇੱਕ ਉਹ ਨਰ ਜਿਹਦੇ ਸੰਗਾ ਆਏ ਹੁੰਦੇ ਨੇ ਬਹੁਤ ਨਾਰਾ ਕਹਿੰਦੇ ਨੂੰ ਦਾਰਾ ਉਹ ਹੈ ਉਹ ਲੜਦਾ ਫਿਰ ਫਿਰ ਭੇਡੂ ਹੈ ਜੇ ਛੱਡੇ ਥੱਲੇ ਰੂੜੇ ਅਮੀਨਾ ਕੋਈ ਨਹੀਂ ਧਰ ਨੂੰ ਜਾਂਦਾ ਉਹਨਾਂ ਮਰਦਾ ਨਾ ਬੜਕੇ ਉਹ ਉਹ ਜਿਹੜਾ ਨਾ ਫੋਕਾ ਲੜੇ ਇਹ ਫੁਨਦਾਰੀ ਝੂਠੇ ਜਿਹੜੇ ਨੇ ਝੂਠੇ ਵੀੜੇ ਨੇ ਆਇਰੇ ਸੰਤ ਕੇ ਜੋ ਵੀਰੇ ਹੀ ਵੀੜੇ ਨੇ ਭਾਈ ਉੱਥੇ ਤਾਂ ਜਦ ਬੰਦੇ ਇਕੱਠੇ ਹੋ ਝੂਠੇ ਸਾਬ ਤੋਂ ਜਾਣਾਂਗਾ ਨੇ ਉੱਥੇ ਡਿਸਕਸ਼ਨ ਤੇ ਆ ਕੇ ਤਾਂ ਮਾਰੇ ਜਾਣੇ ਉਹਨਾਂ ਨੇ ਹਾਂ ਜੀ ਸੰਤ ਕੇ ਦੁਖੀ ਕੀ ਪੁਜੇ ਦਾ ਆਸਾ ਸੰਤ ਦਾ ਦੁਖੀ ਉੱਠ ਚੱਲੇ ਰਹਿਣਾ ਸਾਹਿਬ ਉਹ ਜਿਹੜਾ ਆਪਾਂ ਨੇ ਕਿਹਾ ਸੀ ਵੀ ਇਹ ਜਾਜ ਆ ਜਾਣਾ ਫਿਰ ਚੱਪ ਕਰਾਂਗੇ ਤੁਹਾਨੂੰ ਪਤਾ ਨਹੀਂ ਵੀੜੇ ਨੇ ਵੀੜੇ ਗਦੇ ਉਧਰ ਦੇ ਨੇ ਨਾ ਵੀ ਇਹ ਹੁਣ ਨਾ ਨਾ ਗਾ ਤੱਕ ਇਹ ਹੁਣ ਵਾਲੇ ਨਾ ਇਹ ਹੁਣ ਸਾਰੇ ਹੀ ਵੀੜੇ ਨੇ ਹੋਰ ਮਦਦ ਜਾਵਾਂ ਇਹ ਕਾਲ ਮਰਦੀ ਗੱਲ ਹੀ ਐ ਮਰਦਾਨੀ ਅਹਕਾਰ ਐ ਉਹਨਾਂ ਦੀ ਬਿਣੇ ਵਾਲੀ ਗੱਲ ਐ ਮਾਇਆ ਦੀ ਗੱਲ ਬਿਣੇ ਵਾਲੀ ਗੱਲ ਹੁੰਦੀ ਇਹ ਮਾਇਆ ਦੀ ਗੱਲ ਨਾਲ ਧਰਮ ਨੂੰ ਤੱਦਾ ਬਣਾਉਣਾ ਬੀੜਿਆਂ ਦਾ ਕੰਮ ਸਿੱਧਾ ਹਾਂ ਜਿੱਦਾਂ ਧਰਮ ਤੱਦਾ ਬਿਣਾ ਇਹਦਾ ਭਈ ਧਰਮ ਧਰਮ ਐ ਇਹਦਾ ਧਰਮ ਧਿਆਨ ਹੈ ਉਹਨਾਂ ਦਾ ਉਹ ਧਿਆਨ ਹੈ ਧਰਮ ਉਹਨਾਂ ਦਾ ਮਾਇਆ ਚਾਨ ਤੈਨੂੰ ਦੱਸਦਾ ਬਾਣਾ ਧਰਮ ਦਾ ਮੁਝ ਧਰਮ ਹੈ ਅੰਤੰਤ ਸੱਦ ਕੋਈ ਧਰਮ ਹੈ ਕਦਾ ਵੀ ਕਰਦਾ ਕਿਸੇ ਵੀ ਕਰਦਾ ਸਤਾਂਤਾਂ ਦਾ ਦਰਨੋ ਅੰਤਰੋ ਤੋਂ ਨਾ ਕਰਦਾ ਹੈ ਬਾਰੰਬੂਜ ਸਰ ਜਨਮ ਹੋਰ ਸੁਖ ਹੋਰ ਕਾਢੇ ਦੁੱਖ ਹੋਰ ਉਹ ਆਇਓ ਉਹ ਨੇ ਉਹ ਵਪਾਰੀ ਦੇ ਹਾਂਜੀ ਸੰਤ ਕੇ ਦੋਖੀ ਦੀ ਪੂਜੇ ਦਾ ਆਸਾ ਸੰਤ ਦਾ ਦੋਖੀ ਉੱਪ ਚਲੇ ਸੰਤ ਕੇ ਦੋਖੀ ਦੀ ਪੂਜੇ ਦਾ ਆਸਾ ਉਹਦੀ ਆਸਾ ਨਹੀਂ ਪੂਰੀ ਹੁੰਦੀ ਸੰਤ ਕੇ ਦੋਖੀ ਦੀ ਸੰਤ ਕਾ ਦੋਖ ਜੀ ਉੱਠ ਜੇ ਲੈਣਾ ਰਾਜਾ ਸਦਾ ਜੇ ਜਾਂਦਾ ਹੈ ਦਿਸਾ ਸਹੀ ਜਾਂਦਾ ਆ ਸਭ ਦਿਸਾ ਸੋ ਉਪੇ ਜਾਂਦਾ ਸੰਤ ਕੇ ਦੋਖ ਨ ਤ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਸੰਤ ਕੇ ਦੋਖ ਨਾਲ ਕੋਈ ਅੱਜ ਤੱਕ ਤ੍ਰਿਸ਼ਟਿਆ ਨਹੀਂ ਕਿਸੇ ਦੀ ਤ੍ਰਿਸ਼ਨਾ ਨਹੀਂ अज तक कोई भी आदमी ऐसा नहीं।, नहीं होया संत हो ते विरोध करने वाला तू शांति बनगी होवे तस्ते शांति बनगी होवे तस्ते ना होवे शांति नहीं बन जी नहीं बुजी कोई शांत नहीं होए जैसा पावे पावे कोई होए पावे तैसा हो जाता और जाए तो संत ते दुख ही चले जाओ ਕੁਝ ਫਾਰੇ ਜੀ ਕਿਉਂ ਕਰਦੇ ਨੇ ਵੇ ਜੇ ਕਿਉਂ ਕਰਦੇ ਨੇ ਲੋਕ ਸੱਚ ਦੇ ਦੋਖੀ ਕਿਉਂ ਬਣਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਨਾ ਜੇ ਜੈਸਾ ਕੋਈ ਚਾਹਦਾ ਉਸ ਹੋ ਜਾਂਦਾ ਕੀ ਮਤਲਬ ਸੱਚ ਦੇ ਸੱਚ ਦੇ ਬ੍ਰੋਚ ਰਣਾ ਹੋ ਜਾਂਦਾ ਆ ਇਹ ਸੱਚ ਆ ਅੱਖੇ ਨਹੀਂ ਪਰ ਦ੍ਰਿਸ਼ਟੀਆ ਕੋਈ ਨਹੀਂ ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕੁਈਆ ਤੋਂ ਕੋਈ ਤ੍ਰਿਸ਼ਟੀ ਆਦੀ ਸਾਧ ਦੇ ਧੜੇ ਸਾਧ ਦੇ ਦੋਖੀ ਉਹਦੇ ਧੜੇ ਚ ਲੋਕ ਜਾਂਦੇ ਕਿਉਂਦੇ ਇਹ ਸਵਾਲ ਦਾ ਜਵਾਬ ਜਾਂਦੇ ਨੇ ਕਹਿੰਦੇ ਜੈਸਾ ਕੋਈ ਤੋਬੇ ਦਾ ਸਵਾਲ ਉਹਦੀ ਇੱਛਾ ਹੈ ਉਹ ਪੱਲੇ ਧੜੇ ਚਲਾ ਗਿਆ ਆਪਣੇ ਪਾਰਲੇ ਚੱਲੇ ਭਾਈ ਤਿਰਚੋਕਾਂ ਦਾ ਚੋੜ ਦਾ ਘਾੜੀ ਹੈ ਪਿਆ ਕੀਰਤਨਾ ਬਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਪਿਆ ਕੈਤ ਨੂੰ ਬਿਟੇ ਕੋਏ ਹੋਇਆ ਚਾਹ ਕੋਈ ਨਹੀਂ ਮਿਲ ਸਕਦਾ ਉਹ ਆ ਮਿਲ ਸਕਦਾ ਦੂਜਾ ਨਹੀਂ ਮਿਲ ਸਕਦਾ ਆਪਣਾ ਲਿਖਿਆ ਫੇ ਮਿਲ ਸਕਦਾ ਆਪਣੇ ਅੰਦਰ ਚੱਲ ਰਿਹਾ ਚਾਹ ਤਾਂ ਸੰਦੇ ਇਹ ਚੱਲ ਰਾਇ ਨੇ ਜਿਹੜੇ ਪੱਲੇ ਪੰਜ ਹਜ਼ਾਰ ਰੋਧ ਦੇ ਵਿੱਚ ਉਹ ਕਿਰਤ ਪਏ ਹੋਏ ਨੇ ਮੇਜ ਨੂੰ ਸਾਹ ਇਹ ਕਿਰਤ ਨਾ ਮਿਟੇ ਕੋਏ ਕੋਏ ਨਾਨਕ ਜਾਣੇ ਸੱਚਾ ਸੋ ਉਹ ਅੱਜ ਵੀ ਸਾਹਮਣੇ ਕਿਰਤ ਬਣਾਇਆ ਭਾਈ ਉਹ ਆਪਣੇ ਆਪ ਦਾ ਬੰਦੀ ਛੱਡ ਦਿੰਨ ਪਰ ਕੋਈ ਨਹੀਂ ਛੜਾ ਸਕਦਾ ਨਾਨਕ ਸੱਚਾ ਨਾਨਕ ਵੀ ਜਾਣੇ ਸੱਚਾ ਸਾਰੀ ਗੱਲ ਵੀ ਉਹ ਕਰਦੇ ਨੇ ਕੀ ਕਰਦੇ ਨੇ ਸੱਜੇ ਨੂੰ ਤਾਂ ਸਭ ਪਤਾ ਹੀ ਆ ਪਰ ਕਰ ਕਰ ਉਹ ਵੀ ਥੋੜਾ ਸੱਚੇ ਨੂੰ ਕਰਤ ਬਟਾ ਉਹਦੀ ਲੋੜੀ ਜਾਇਓ ਵੀ ਲੈਣਗੇ ਉਹਨੂੰ ਦੂਜੀ ਟੀਮ ਚ ਨਹੀਂ ਬੰਦਾ ਚਾਹੀਦੇ ਉਹ ਦੁਵੇ ਨਰਕਾਂ ਦੇ ਵਿੱਚ ਕਿਨੂੰ ਵਜੂਗਾ ਇਹਨੂੰ ਨਰਕਾਂ ਚ ਭੇਜਣਾ ਉੱਧਰ ਵੀ ਤਾਂ ਲੋੜ ਹੈ ਦੂਰੇ ਫਸ ਤੇ ਮੁਰਗੇ ਮਾਰ ਕੇ ਤਾਂ ਹੀ ਨਹੀਂ ਖਾਂਦੇ ਇਹ ਲੋਕ ਪ੍ਰਚਾਰ ਕਰਦੇ ਆਨ ਮੁਰਗੇ ਬੰਨਣਾ ਪੈਂਦਾ ਸਾਨੂੰ ਬੰਨ੍ਹ ਕੇ ਰੱਖ